ਉਸ ਵੇਲੇ ਸੱਜਣਾ ਇਹ ਤੇ ਅਸਾਂ ਇਤਿਹਾਸਾ ਵਿੱਚ ਗੱਲਾਂ ਪੜੀਆਂ ਵੇ ਫਲਾਣੇ ਨੂੰ ਕੋਈ ਛੋੜਾ ਪਿਆ ਤੇ ਦੁੱਖ ਲਗਾ ਇਹ ਸਤਿਗੁਰੂ ਪ੍ਰਤਾਪ ਸਿੰਘ ਦੇ ਵੇਲੇ ਇੱਥੇ ਪੈਣੀ ਸਾਹਿਬ ਵਿੱਚ ਕਿਤੇ ਟਰੱਕਾਂ ਤੇ ਬੱਸਾਂ ਦਿਨ ਚੜਦੇ ਉਹਨੂੰ ਖਲੋਣ ਨੂੰ ਥਾਣਗੇ ਇਹ ਖੁੱਲੇ ਸਮਾਜ ਦੀ ਮਾਈ ਛੋਟਾ ਜਿਹਾ ਬੱਚਾ ਉਹਦਾ ਨਾਲ ਤੇ ਪੁੱਬਾ ਮਾਰਦੀ ਆਵੇ ਐਸ ਪਾਸੋਂ ਤੇ ਉਹ ਬੱਚਾ ਪੁੱਛਦਾ ਮਾਂ ਕਿਹੜਾ ਗੁਰੂ ਤੁਰ ਗਿਆ ਜਿਹੜਾ ਸਾਨੂੰ ਚੇਤਰ ਵਿੱਚ ਦਾਣੇ ਦਿੰਦਾ ਹੁੰਦਾ ਸੀ ਆਰ ਉੱਤ ਜਦੋਂ ਹੁਣੀ ਲਾਗੇ ਦੇ ਆ ਪਿੰਡਾਂ ਵਿੱਚ ਭਾਵ ਕੋਈ ਖੁੱਲਾ ਤੇ ਭਾਵ ਕੋਈ ਨਾਮ ਤਾਰਿਆ ਆ ਆਵਾਜ਼ ਦੇਣੀ ਪਈ ਜਿਹਦੇ ਕੋਲ ਦਾਣੇ ਨਹੀਂ ਲੈ ਜੋ ਹੋਣਗੇ ਤੇ ਦੇ ਛੱਡਿਓ ਨਾ ਹੋਣਗੇ ਤਾਂ ਵੀ ਕੋਈ ਤੇ ਉਹ ਪੁੱਤ ਨੂੰ ਹੌਸਲਾ ਦਿੰਦੀ ਆ ਪੋਤੇ ਆ ਪੋਤਰਾ ਬੱਚਾ ਉਹ ਗੁਰੂ ਆ ਜਿਹੜਾ ਸਾਨੂੰ ਦਾਣੇ ਦਿੰਦਾ ਸੀ ਤੇ ਪੱਬਾਂ ਮਾਰਦੀ ਇੱਥੇ ਕਰਬਾਟ ਮਚਿਆ ਆ ਜਣ ਚੜਦੇ ਨੂੰ ਪਾਕਿਸਤਾਨ ਵਿੱਚੋਂ ਲਾਮ ਮੁਲਕਾਂ ਵਿੱਚੋਂ ਤਾਰਾ ਫੇਰ ਦਿੱਤੀਆਂ ਉਸੇ ਕਾਰ ਤੇ ਚੜ ਕੇ ਮਹਾਰੇ ਵੀਰ ਸਿੰਘ ਨੇ ਜਾ ਕੇ ਲੁਧਿਆਣੇ ਵਿੱਚ ਖਬਰਾਂ ਦੇ ਦਿੱਤੀਆਂ ਤੋਂ ਮੇਰੇ ਕਹਿਣ ਦਾ ਭਾਪ ਸੱਜਣੋਂ ਪੱਕੀ ਸ਼ਰਕ ਸੀ ਨਾ ਇੱਥੇ ਕਿਤੇ ਖਲੋਣ ਨੂੰ ਥਾਣੀ ਬੇ ਸੁੱਧ ਡਿਗੇ ਆ ਤੇ ਟਾਈਮ ਆ ਗਿਆ ਸੰਸਕਾਰ ਕਰਨ ਦਾ ਚਾਰ ਵਗਤ ਦਾ ਟਾਈਮ ਦਿੱਤਾ ਸੀ ਇੱਥੋਂ ਫਿਰ ਗੋਲ ਮੰਦਰੋਂ ਜਲੂਸ ਕੱਢਿਆ ਤੇ ਭੈਣੀ ਸਾਹਿਬ ਜਾਣਾ ਸੀ ਤੇ ਸੰਸਕਾਰ ਜਿੱਥੇ ਵਰਣੀਆਂ ਤੁਹਾਨੂੰ ਪਤਾ ਇੱਥੇ ਅੰਬ ਹੁੰਦਾ ਸੀ ਉਸ ਅੰਬ ਨੂੰ ਵੱਢਿਆ ਉਹਦੀ ਜਗ੍ਹਾ ਉੱਤੇ ਮਹਾਰਾਜ ਵੀਰ ਸਿੰਘ ਨੇ ਬੜੇ ਬੜੇ ਜਵਾਨ ਮੇਲੇ ਵਿੱਚੋਂ ਚੁਗੇ ਕਿ ਜਦੋਂ ਸੱਚੇ ਪਾਤਸ਼ਾਹ ਦਾ ਸਰੀਰ ਦਾ ਸਤਕਾਰ ਹੋਣ ਲੱਗਾ ਇੱਕ ਦੂਜੇ ਦੀਆਂ ਬਾਹਾਂ ਫੜ ਲੋ ਕੋਈ ਮਸਤਾਨਾ ਵਿੱਚ ਨਾ ਡਿੱਗ ਜੇ। ਤੋਂ ਲੱਕੜਾਂ ਉੱਤੇ ਲਿਆ ਕੇ ਸਤਿਗੁਰੂ ਪ੍ਰਤਾਪ ਸਿੰਘ ਦਾ ਜਿਸਲੇ ਸਰੀਰ ਰੱਖਿਆ ਤੇ ਉਹ ਨੌਜਵਾਨ ਜਿਹੜੇ ਸੀ ਨਾ ਚਾਰ ਸ਼ੇਰੇ ਕੁੱਟ ਕੇ ਬਾਹੀਂ ਫੜੀਆਂ ਪੁਲਿਸ ਵੀ ਬੜੀ ਸੀ ਇੰਤਜ਼ਾਮ ਕਰਨ ਵਾਸਤੇ ਇਤਰਾ ਫਿਰ ਕਰਬਲਾੜ ਦਾ ਰੋਲਾ ਪਿਆ ਕਿ ਉਹਨਾਂ ਦਾ ਪਤਾ ਹੀ ਨਹੀਂ ਉਹ ਜਵਾਨ ਕਿੱਧਰ ਚਲੇ ਗਏ ਨੇ ਦਲੀਲ ਮਲੀਏ ਸਤਗੁਰਾਂ ਦਾ ਸਰੀਰ ਨੇ ਲੱਭਦਾ ਟਾਈ ਮਾਰ ਕੇ ਬਦੋ ਬਦੀ ਸੇਬ ਤੇ ਜਾ ਕੇ ਚੜ੍ਹ ਮਹਾਰਾਏ ਨੇ ਆਸਿੰਘ ਮਹਾਰਾਜ ਜਾਂਗ ਸਿੰਘ ਜੀ ਜਿਨ੍ਹਾਂ ਦੀਆਂ ਪੱਗਾਂ ਲੱਥ ਗਈਆਂ ਫੜ ਕੇ ਪੱਗਾਂ ਵਾਲ ਖਲਰੇ ਆ ਪਾਸ ਇਹ ਕਰਬਲਾਟ 2 ਘੰਟੇ ਮੱਚਾ 6 ਦਾ ਟਾਈਮ ਹੋ ਗਿਆ ਸਤਗੁਰੂ ਜੀ ਜੀਸਸ ਸੱਚੇ ਪਾਤਸ਼ਾਹ ਇੱਕ ਲੰਮਾ ਜਿਹਾ ਸਰੀਰ ਸੀ ਉਹਨੂੰ ਬਹਾ ਕੇ ਉਹਦੇ ਮੋਢਿਆਂ ਤੇ ਚੜ੍ਹ ਕੇ ਹੱਥ ਜੀ ਕਿ ਹੁਣ ਨਾ ਇਦਾਂ ਕਰੋ ਰਾਤ ਦਾ ਟਾਈਮ ਆ ਗਿਆ ਸਤਕਾਰ ਹੋ ਜਾ ਬੜਾ ਹੌਸਲਾ ਦਿੱਤਾ ਪੁਲਿਸ ਨੇ ਬੜੇ ਜਤਨ ਕੀਤੇ ਪੁਲਿਸ ਦੇ ਵੀ ਲੀੜੇ ਪਾਟ ਗਏ ਮੁੜਕੋ ਮੁੜਕੀ ਪ੍ਰਸਿਨੇ ਹੋ ਗਏ ਉਹ ਆਖਣੋ ਕਰੀਏ ਕਿ ਟਾਈਂ ਤੇ ਅੱਗੇ ਵਜਣ ਨਹੀਂ ਆ ਕਰੀਏ ਕਿ ਪੁਲਿਸ ਵੀ ਰੌਂਡ ਨਹੀਂ ਸੀ ਤੋ ਕਵੀ ਕਹਿੰਦਾ ਭਈ ਜਿਸੋ ਇਹ ਲੰਬੂ ਫਿਰ ਕਹਿਣ ਲਾਇਆ ਠਾਕਰ ਦਲੀਪ ਸਿੰਘ ਲੰਬੂ ਲਾਉਣ ਲੱਗਾ ਤੇ ਲੰਬੂ ਲਾਉਣ ਦੇ ਟਾਈਮ ਫੇਰ ਕੂਕਿਆਂ ਨੂੰ ਦੁਬਾਰੇ ਕੀ ਹੋ ਗਿਆ ਐਮ ਕਰਕੇ ਕਵੀ ਕਿਹਾ ਕਿਸਮਤ ਸੜ ਗਈ ਸੰਸਾਰ ਦੀ ਹੋ ਗਈ ਕੋਰਾ ਕਿਸਮਤ ਸੜ ਗਈ ਸੰਸਾਰ ਦੀ ਹੋ ਗਈ ਕੋਰਾ ਦਿਨ ਪੰਜ ਪਾਦਰੋਂ ਲਗਾ ਉਹ ਕੀ ਕਹ ਮਾਰੀਆਂ ਕੂਕਿਆ ਉਹ ਸਵੇਰੇ ਉਹ ਲੰਬੂ ਹੱਤੀ ਦਲੀਪ ਜਾਂ ਲਾਉਣ ਲਗਾ ਦਿਖਾ ਉਤੇ ਉਥਾ ਫੁੱਲਾਂ ਦੀ ਹੰਝੂ ਵਰਸਾਂ ਲਗਾ ਉਹ ਤੁਦਾਂ ਮਾਰੋ ਤਤ ਦਰਸ ਰੋਇਆ ਉਹ ਲੰਬੂ ਅੱਖੀ ਜਲਦੀ ਪਜਾ ਲਾਉਣ ਲਗਾ ਕਰਾ ਸਿਫਤ ਕੀ ਤੇਰੀਆਂ ਬਰਕਤਾਂ ਦੀ ਜਸ ਗਾਮ ਦਾ ਕੁੱਲ ਸੰਸਾਰ ਤੇਰਾ ਲੱਖਾਂ ਵਰਨੀਆਂ ਖਾਂਡਿਆ ਤੋਸ਼ ਕੀਤੇ ਵਹਿਗਤੀ ਵਿੱਚ ਸਮਾਰ ਤੇਰਾ ਸੋਹਣਾ ਮੁਖੜਾ ਫੁੱਲ ਗਾਮ ਦਾ ਸਹੀ ਇਹ ਵਦ ਸੂਰਜੋਂ ਸੀ ਚਮਕਦਾ ਤੇਰਾ ਸੋਨਾ ਮੁਖੜਾ ਫੁੱਲ ਗੜਾਵਦਾ ਸਹੀ ਵੇਓ ਇਹ ਵਾਦ ਕਾਸੀ ਚਮਤਕਾਰ ਤੇਰਾ ਉਹ ਦੁੱਖ ਗਉ ਗਰੀਬ ਦਾ ਦੂਰ ਹੋਵੇ ਇਹੋ ਜਿਹਾ ਸਾਂਝਾ ਪ੍ਰਚਾਰ ਤੇਰਾ juddi ya